ਸ਼ਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵੈ ਸਦਾ ਸਾਚਾ ਅੰਦਿਨ ਸਹਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਧ ਉਰਤਾਰ ਜਿਹੜੇ ਨੇ ਉਹ ਸਦਾ ਹੀ ਸਾਚੇ ਪ੍ਰਭ ਦੀ ਸੇਵਾ ਸੱਚਾ ਸੱਚੇ ਦਾ ਨਾਮ ਉਹ ਜਿਹੜਾ ਨਾ ਜਪਦਾ ਹੁੰਦਾ ਈ ਤੇ ਅਸੀਂ ਆਪਣੀ ਭਾਸ਼ਾ ਵਿੱਚ ਸੱਚਾ ਹੋਰ ਕਿਸੇ ਕਹਿ ਨਹੀਂ ਸਕਿਆ ਆਦਮੀ ਨੂੰ ਸੱਚਾ ਕਰ ਹਾਂ ਪਰ ਗੁਰਬਾਣੀ ਦੀ ਭਾਸ਼ਾ ਵਿੱਚ ਸੱਚ ਕੀ ਹੈ ਸੱਚ ਪੁਰਾਣਾ ਮਨ ਝੂਠਾ ਸਾਡਾ ਮਨ ਝੂਠਾ ਜਦ ਜੋ ਹੈ ਮਨ ਝੂਠਾ ਹੈ ਬਹੁਤ ਇਹਦੀ ਤਾਕੀ ਹੈ ਹੁੰਦਾ ਸੱਚਿਆਰਾ ਹੋ ਜਾਂਦਾ ਸੱਚਿਆਰਾ ਸੱਚ ਨਾਲ ਹੀ ਹੋ ਜਾਂਦਾ ਹੈ ਕਿ ਤੂੰ ਯਾਰ ਬਣਾ ਲੈਂਦਾ ਸੱਚ ਨਾਲ ਯਾਰ ਆਪਨਾ ਹੋ ਜਾਂਦਾ ਪ੍ਰੇਮ ਹੋ ਜਾਂਦਾ ਤੇ ਸੱਚੇ ਦੇ ਨਾਲ ਜੁੜ ਜਾਂਦਾ ਇਹਦਾ ਸਾਥਿਆਨ ਇਹ ਹੀ ਅੰਸ ਹੈ ਮਨ ਇਹ ਸੱਚੇ ਨਾਲ ਜੁੜ ਹੈ ਜਿਹੜਾ ਇਹ ਹੀ ਪਰਮ ਆਤਮਾ ਹੈ ਸੱਚਾ ਬਸਦਾ ਹੀ ਸੱਚ ਘਟ ਪ੍ਰਭ ਸੇਵੈ ਸਦ ਸੱਚਾ ਅੰਨ ਸਹਿਜ ਪਿਆਰ ਉਸ ਸਹਿਜ ਉਸਤਾਜਾਂ ਲੈਣੇ ਪਰ ਉਹਨਾਂ ਦਾ ਪਿਆਰ ਕਿਹਦੇ ਨਾਲ ਸੋਹਣਾ ਨਾਲ ਪਿਆਰ ਹੈ ਪਿਆਰ ਕਿਹਦੇ ਨਾਲ ਆਪ ਕੋਈ ਨਹੀਂ ਨਾ ਭਵਤੀ ਪਰ ਵੇਸ਼ਰ ਨਾਲ ਪਿਆਰ ਹੈ ਜੇ ਹੁਕਮ ਨਾਲ ਪਿਆਰ ਹੈ ਜੇ ਉਹਦੇ ਹੀ ਸਾਰੇ ਜੀਵ ਜੇ ਕਿਸੇ ਆਦਮੀ ਨਾਲ ਤੁਹਾਡਾ ਪਿਆਰ ਹੈ ਉਹਦੇ ਬੱਚਿਆਂ ਨਾਲ ਪਿਆਰ ਕਿਵੇਂ ਨਹੀਂ ਹੋਊਗਾ ਠੀਕ ਹੈ ਜੀ ਸਦਾ ਆਨੰਦ ਗਾਮੇ ਗੁਣ ਸਾਚੇ ਅਰਧ ਉਰਧ ਉਰਤਾਰ ਸਦਾ ਆਨੰਦ ਰਹੇ ਜੀ ਕੋਈ ਸ਼ੰਕਾ ਕੋਈ ਨਹੀਂ ਕਿਸੇ ਨਾਲੋਂ ਕੈਸੇ ਸ਼ਰੂਪ ਕਰਦਾ ਬਾਪ ਐਸਲਦਾ ਕੌਣ ਰਹਿ ਤੇ ਰਹਿਦਾ ਤਾਂ ਉਹ ਵੀ ਤਾਂ ਪਿਓ ਐ ਪਿਓ ਨੂੰ ਤੇ ਤੇ ਕੋਈ ਕਸੂਰ ਹੋਊਗਾ ਪਿਓ ਰੇ ਜਿਵੇਂ ਮਰੀਏ ਲੇ ਮੈਂ ਪਿਓ ਤੇ ਗੁੱਸਾ ਕਰਾਂ ਪਾਗਲ ਦਾ ਮੈਂ ਆਹ ਕਿਤੇ ਪਿਓ ਨੂੰ ਸਹਾਰਾ ਆ ਮੇਰੀ ਜਗਾ ਹੰਦਲਦੀ ਤੇ ਉਹਦੀ ਘਟਾ ਸੰਸਾਰ ਸੱਤੀ ਐ ਜਾਂ ਕੁਛ ਕੱਲ ਲਿਓ ਲਗਾਰੀ ਦੁਰਿਓ ਤੇ ਕੁਛ ਕੀਓ ਸਰਦ ਉਹ ਕਿਸੇ ਨੂੰ ਗਰੀਬ ਰੱਖੇ ਜਾਂ ਰੱਖੇ ਇਦੋਂ ਤਾਂ ਤੇ ਬਾਬਰ ਦਾ ਰਾਜ ਕਰ ਲਵੇ ਬਾਬਰ ਦੇ ਉੱਤੇ ਸੋ ਤਾਂ ਨਾ ਰਾਜ ਜਦੋਂ ਕੋਈ ਫਰਕ ਪੈਂਦਾ। ਕੋਈ ਨਾ ਕੋਈ ਫਰਕ ਪੈਂਦਾ। ਇਹ ਬਰ ਪੈਂਦਾ ਇਹਨਾਂ ਨੂੰ ਆ ਜਿਹੜੇ ਰਾਜ ਕਰੇਗੇ ਖਾਲਸਾ ਹਾਂਜੀ ਸਦਾ ਆਨੰਦ ਗਾਵੈ ਗੁਣ ਸੱਚ ਅਰਧ ਉਰਧ ਉਰਤਾਰ। ਅਰਧ ਉਰਧ ਉਰਤਾਰ ਜਿੱਦ ਸੀਗਾ। ਲੈ ਪੋਖੇ ਪਾਸੇ ਚਲੇ ਸੀ। ਅਰਦਾਸ ਭਾਈ ਇੱਕ ਬਾਣ ਹੀ ਇਕੱਠ ਹੋ ਕੇ ਦਾ ਦੁੱਧ ਇੱਕ ਬਾਣ ਦੇ ਇਕੱਠ ਹੋ ਕੇ ਉਹ ਪਿਆਰ ਕਰਦੇ ਨੇ ਸਾਰਿਆਂ ਨਾਲ ਇੱਕ ਬਾਣ ਹੀ ਇਕੱਠ ਹੋਏ ਬੰਨ ਪਿਆਰ ਸਾਰਿਆਂ ਨੂੰ ਤੇ ਜੇ ਜੇ ਟੱਪੜ ਮਾਰੇ ਹਰੋਗ ਦਾ ਕੋਈ ਨਹੀਂ ਗੱਤੀ ਹੋਊਗੀ ਗਾਹ ਨੂੰ ਭਾਈ ਕਰੀ ਗਲਤੀ ਤੇ ਸੱਜੀ ਹੁੰਦੀ ਇਹਦੇ ਇੰਧਿਆ ਹੁੰਦਾ ਸੀ ਘਰ ਸਾਲਿਆਂ ਸੀ ਯੋਦਾ ਗੁੱਡੇ ਦੇ ਸਭ ਤੋਂ ਹੱਥ ਰੱਖੀ ਉਹਨੂੰ ਬਿਰਾਦੀ ਏ ਕੋਈ ਗਲਤੀ ਕਰੇ ਤੇ ਟੱਪੜ ਪੈ ਜਾਂਦਾ ਹੀ ਉੱਧਰ ਕਾਹ ਗਲਤੀ ਕਰਦੇ ਠੀਕ ਹੈ ਜੀ ਇਹਨਾਂ ਨੇ ਦੇ ਅਰਥ ਕੀਤੇ ਹੈਠਾਂ ਉੱਤੇ ਜਾਂ ਹਰ ਉਹਨਾਂ ਨੂੰ ਤਾਂ ਆਪ ਮਾਫ਼ੀ ਦੇ ਦੋ ਜਦੋਂ ਨੂੰ ਪਤਾ ਹੀ ਕੁਝ ਨਹੀਂ ਹੈ ਠੀਕ ਹੈ ਜੀ ਅਰਦ-ਉਰਦ ਸਮਾਨਾ ਗੁਰੂ ਜੀ ਸੀ ਕੌੜੀ ਦਾਲ ਚ ਅਰਦ-ਉਰਦ ਬੜੀ ਹੋਈ ਹੈ ਉਹ ਧਾਲ ਇਕੱਠੀ ਹੋਈ ਹੈ ਹੋਰ ਕੀ ਹੋਇਆ ਉਹਨਾਂ ਦੇ ਬਹੁਤ ਨਾਲ ਹਰ ਦੂਹ ਹਰ ਕਰੋਗੇ ਸੰਸਰ ਕੋਈ ਨਹੀਂ ਜੋ ਕੋਈ ਦੇਖਣਾ ਜਿਹਨੇ ਜੋਗੇ ਤੁਰ ਕਰਮ ਲਿਖਿਆ ਕਰਤਾਰ ਨਾਨਕ ਆ ਕਿਰਪਾ ਧਾਰ ਅੰਤਰਪ੍ਰੀਤ ਬਸਿਆ ਅੰਦਰ ਪ੍ਰੀਤ ਬਸ ਜਾਂਦਾ ਆ ਸਭ ਤੋਂ ਪ੍ਰੀਤ ਬਸਿਆ ਆਇਆ ਇਹਨਾਂ ਕਿ ਨੇ ਫਿਰਦੇ ਬਚਲੇ ਇਹ ਹਜ਼ਾਰ ਰੁਪਇਆ ਇਕੱਠੇ ਹੋ ਜਾਂਦੇ ਆ ਆਪੇ ਪ੍ਰੀਤ ਬਣੇ ਬੁੱਧੀ ਦਾ ਬੁੱਧੀ ਕਹਿ ਰਈਆ ਕਹਿੰਦੀ ਹੁਣ ਪ੍ਰੀਤ ਬਸਿਆ ਆ ਕੇ ਜੋ ਇਕੱਠੇ ਅੰਦੇ ਦਾ ਦੁਆਨੇ ਦੂਗੀ ਕਰਤਾ ਇਕ ਉਧਰੋਂ ਵਾਖੇ ਚਾਹੇ ਇਕ ਭਰਮ ਭਲਾਏ ਕੋ ਲਾਏ ਉਹਨਾਂ ਦਾ ਵਾਣਿ ਸਲਾ ਇੱਕ ਸਿੱਧੇ ਪਾਸੇ ਵਿਚਾਰ ਹੈ ਸੁਕੇ ਸੋ ਫੜੇ ਦੇਖਵਾਸੇ ਕੋ ਜਗਾਈ ਦੀ ਟਾਰਗੇਟ ਸਿੱਧਾ ਦੀਦਾ ਬਹੁਤ ਦਾ ਫਿਕਰ ਚੱਕਿਆ ਗਿਆ ਸਾਰੇ ਮਸਲੇ ਹੱਲ ਹੋ ਗਏ ਫੁਕ ਦੁਨੀਆਂ ਦੀ ਕੋਈ ਰਹੀ ਦੀ ਤਾਂ ਘਹਿ ਰਹੀ ਅੰਦਰ ਖੁਸ਼ ਤ੍ਰਪੀ ਕੰਬਸਿਆ ਸ਼ਬਦ ਗੁਰੂ ਸੰਧੀ ਕਿਉ ਜਾਣੈ ਗੁਰਮੁਖ ਸੰਧੀ ਮਿਲੈ ਮਨ ਮਨ ਤੁਸੀਂ ਆਪਣੇ ਤੁਹਾਨੂੰ ਹੀ ਕਾਨਕ ਆਪ ਮਿਲਾਇਨ ਆਪੇ ਕਿਰਪਾਤਾਰ ਹਰਤਾਲ ਨੇ ਹੁਕਮ ਕਰਤਾ ਤੁਰੂ ਕਰਨ ਦੇ ਕਿਆ ਕੀਆ ਹੁਕਮ ਕਰਤਾ ਅਸੋਗ ਹੋਇਆ ਸੁਣੀ ਰਿਆ ਸੁਣੀ ਗਈ ਸਤ ਸੰਤੋਖ ਹੋਵੇ ਅਰਦਾਸ ਸਤ ਸੰਤ ਸਦ ਬਹਾਰੇ ਪਾਸ ਸਤ ਸੰਤੋਖ ਦੀ ਅਰਦਾਸ ਕਿਤੇ ਨਹੀਂ ਚਾਹੀਦਾ ਕੋਈ ਚੇਤੇ ਮਨਾ ਉਹ ਕਹਿੰਦਾ ਜੋ ਸੁੱਕੇ ਸਦਕੇ ਪਾਸ ਪਹੁੰਚਾ ਲਿਆ ਜਨੇ ਲਾਵੇ ਬੈਠਾ ਮੇਰੇ ਕੋਲੇ ਬੈਠੋ ਫੋ ਜ਼ੈਨਾਬ ਅਪੇ ਕਿਰਪਾਤ ਆ ਰਹੀ ਹੈ ਕਿਰਪਾ ਕਰ ਦਾ ਮਤਲਬ ਸੀ ਅਰਧ ਦਾ ਜਿਹੜਾ ਆਪਸ ਮਿਲਾਪ ਹੋਇਆ ਇਹਨਾਂ ਵਾਸਤੇ ਮਲਾਇਆ ਲਿਖਿਆ ਹੈ ਜੀ ਹਾਂ ਮਿਲਾਪ ਨੇ ਕੋਈ ਇੱਕ ਕਰ ਕਹੀਏ ਕਥੀਏ ਨਾ ਪਾਈਏ ਦਿਨ ਰਹੋ ਅਦਾ ਗੁਣ ਗਾਏ ਬਿਨ ਕਰਮੈ ਕਿਨੇ ਬਿਲ ਲਾਏ ਕਹੀਏ ਕਥੀਏ ਨਾ ਪਾਈਏ ਵੱਲੇ ਨਾ ਬੋਲਰ ਤੈਨੂੰ ਕਤਲ ਨਾ ਮਿਲਦੀ ਬਣਦੀ ਕੱਟ-ਕੱਟ ਕਈ ਲੁਕਾਈ ਕਈ ਇਹ ਵਿਚਾਰ ਕਰੋ ਗੁਰੂ ਨੂੰ ਕਰੋ ਗਿਆਨ ਮਿਲੇ ਗਿਆਨ ਹੋਰ ਗਿਆਨ ਹੋ ਗਿਆਨ ਹੋਰ ਗਿਆਨ ਹੋਰ ਚਾਨਣ ਹੋਰ ਗੁਰੂ ਗੁਰੂ ਦਾ ਮਤਲਬ ਹੈ ਹੋਰ ਚੱਲਬਦੀ ਜਾ ਫੇਰ ਦੇ ਦੇ ਦੇ ਅਗਰੋਛ ਦੀ ਮਿਲੇ ਠੀਕ ਹੈ ਜੀ ਬਿਨ ਕਰਮਾ ਕਿਨੇ ਨਾ ਪਾਇਓ ਭੌਂਕ ਮੂਏ ਬਿੱਲ ਆਏ ਬਖਸ਼ਿਸ਼ ਤੇ ਬਿਨਾ ਕਿਸੇ ਦੂਰੀ ਮਿਲਿਆ ਭੌਂਕ ਉਹ ਭੌਂਕ ਉਹ ਗੈ ਤਾਂ ਉਹਨਾਂ ਨੂੰ ਜਿਹੜੇ ਅੱਜ ਸਾਡੇ ਤੇ ਵੀ ਲਾਗੂ ਹੈ ਇਹ ਕਹਾਤਾ ਦਸਤਾਨ ਇੱਕ ਆਦਮੀ ਚੋ ਜਿਹੜੇ ਕਿਸੇ ਨੂੰ ਮਿਲਿਆ ਹੋਵੇ ਕਹਾਤਾ ਸਾਬਤ ਕਰ ਉਹਨਾਂ ਤੇ ਲਾਗੂ ਹੈ ਭੌਂਕ ਬਿੱਲ ਆਏ ਕਹਤਾ ਜਿਹੜੇ ਉੱਚੀ ਉੱਚੀ ਵੰਗੂ ਵੰਗੂ ਯਾਰਾ ਰਾਮ ਰਾਮ ਲਾਓ ਜੋ ਵੀ ਕੁਛ ਕਰਦੇ ਨੇ ਕੀਰਤਨ ਵਾਲੇ ਕੀਰਤਨ ਵੀ ਕਰਦੇ ਨੇ ਭੰਕੜਾ ਬੋਲ ਰਹਾ ਹੁੰਦਾ ਉਹ ਨਾਲ ਬੋਲ ਕੋਈ ਸਬਦ ਕਰਿਓ ਨੂ ਕੋਈ ਮੇਲੂ ਜੇ ਬੜਿਆ ਨਹੀਂ ਤਾਂ ਸਾਨਾ ਤੇ ਲਾਗੂ ਹੋਗੀ ਭਗਤੀ ਭੌਂਗ ਬੂਏ ਮਿਲ ਲਾਏ ਬਰਲਾ ਕਰਦੇ ਵਰਦੇ ਭੌਂਗ ਪਾਠ ਪੜਨਾ ਵੀ ਨਹੀਂ ਵਰਦੇ ਉਹਨੂੰ ਕੋੜਾ ਬੁਦੀ ਤੂੰ ਕੀਰਤਨ ਕਰਨਾ ਬਨੇ ਬਨੇ ਆਖੋਖੜਾ ਬਨੇ ਜੀ ਬੋਲੇ ਆਖੋ ਜੀ ਕੁਰਬਾਨੀ ਤਾਂ ਇਹ ਕਹਿੰਦੀ ਹੈ ਜੇ ਇਹ ਨਹੀਂ ਕਹਿੰਦੀ ਤੇ ਵਿਚਾਰ ਕਰ ਲੋ ਜਿਨ੍ਹਾਂ ਨੂੰ ਸੀ ਨਾਵੜੋਂ ਨੂੰ ਨਾ ਉਹਨਾਂ ਨੂੰ ਪਤਾ ਸੀ ਵੀ ਇਹ ਗੱਲਾਂ ਨਹੀਂ ਸਾਥੇ ਹੋਣੀਆਂ ਜਵਾਬ ਦੇ ਲਈ ਜੇ ਉਹ ਕੀ ਆ ਗੱਲਾਂ ਲਿਖੀਆਂ ਹੋਈਆਂ ਗੁਰਬਾਣੀ ਦੀਓ ਇਹ ਤੇ ਖੜੇ ਉੱਤਰ ਨਹੀਂ ਹੋਣਾ ਜਿਵੇਂ ਸਾਨੂੰ ਆ ਜਾਣੇ ਅੱਜ ਕੱਲ ਪੈ ਗਈ ਸਾਡੇ ਠੀਕ ਹੈ ਜੀ ਜੀ ਜੋ ਨਕਲ ਕਰਦੀ ਉਹਨੂੰ ਜੀ ਆਂ ਕਰਦੇ ਕਮ ਠੀਕ ਹੈ ਜੀ ਗੁਰ ਸ਼ਬਦ ਮਨ ਤਨ ਭਿੱਜੈ ਆਪ ਵਸੈ ਮਨ ਆਏ ਨਾਨਕ ਨਜ਼ਰੀ ਪਾਈ ਆਪੇ ਲਏ ਮਿਲਾਏ ਗੁਰਕੇ ਸ਼ਬਦ ਮੰਤਰ ਭਜਾ ਮੰਤਰ ਭਜਦਾ ਗੁਰੂ ਦੇਸਾਂ ਦੀ ਗੁਰਬਾਣੀ ਰੋਲ ਠੀਕ ਹੈ ਗੁਰਕੇ ਸ਼ਬਦ ਮੰਤਰ ਭਜਾ ਆਪ ਬਸੈ ਮਨ ਆਏ ਆਪ ਬਸਾ ਗੁਰੂ ਜਿਆਦਾ ਮਾਰ ਭਜਦਾ ਪੱਥਰ ਭਜਦਾ ਤਾਂ ਪਾਣੀ ਅੰਦਰ ਤੋਂ ਹੀ ਚਲੇ ਜਾਂਦਾ ਸਾਧੀਆਂ ਨਾਲ ਮੰਤਰ ਦੇ ਵਿੱਚ ਜਾ ਕੇ ਉੱਤੇ ਜਿਆਦਾ ਪੱਥਰ ਮਾਰ ਬਿਝੂਗਾ ਅੰਦਰ ਸਾਇਰ ਚਲੇ ਜਾਣਾ ਦਾ ਨਾ ਆਪ ਦਾ ਅਸਰ ਅੰਦਰ ਫਿਰ ਚਲੇ ਜਾ। ਚਲੇ ਤਾ ਜਿਲੀ ਪੱਥਰ ਦਿੱਤੇ ਜਿਲੀ ਗੜਾ ਹੈ ਜਿਆ ਪੀਂ ਜਾਂਦਾ ਸਾਰ ਅੰਦਰ ਸਹੀ ਕੋਲ ਕੇ ਉਹ ਵਸਿਆ ਜੀ ਆਪੋ ਬਸੇ ਹਨ ਆਏ ਨਾਨਕ ਨਜ਼ਰੀ ਪਾਈ ਆਪੇ ਨਹੀਂ ਉਹ ਕਹਿੰਦਾ ਇਹ ਤਾਂ ਉਹਦੀ ਕਿਰਪਾ ਹੋ ਜਾ ਬਹਿਰ ਦੀ ਕਿਰਪਾ ਨੂੰ ਨਜ਼ਰ ਕਹਿੰਦੇ ਨੇ ਕਿ ਬਹਿਰ ਦੀ ਨਜ਼ਰ ਹੋ ਜਾ ਫਿਰ ਉਹ ਆ ਬੁਲਾ ਲੈਂਦਾ ਜੇ ਸੁਣ ਲਵੇ ਤਾਂ ਜਿੱਦੇ ਸੁਣ ਲਵੇ ਸਾਸਣ ਤੋਗਦੀ ਅਰਦਾਸ ਵੀ ਹੋਵੇ আর ਸੁਣਦੀ ਲਵੇ ਫਿਰ ਇਹ ਗੱਲ ਬਣ ਜੂਗੀ ਵਾਲਾ ਨਹੀਂ ਬਣਦੀ ਪੰਜ ਇੱਕ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥੈ ਆਪ ਭਜੈ ਆਪੇ ਹੀ ਪੂਜੈ ਕਰਤਾ ਆਪ ਪਰਪੰਚ ਕਰਿਜੈ ਇਹ ਗਿਆਨ ਸਾਡੇ ਅੰਦਰ ਦੇਵਤਾ ਦਾ ਦੇ ਅੰਦਰ ਅਸੀ ਵੇਦ ਪੁਰਾਣ ਆਪੇ ਛਿਏ ਲਿਖਣ ਵਾਲਾ ਹੈ ਪੁਰਾਣ ਲਿਖਣ ਵਾਲਾ ਹੈ ਇਹ ਨੇ ਸਭ ਸ਼ਾਸਤਰ ਲਿਖੇ ਨੇ ਇਹਦੀ ਅਵਸਥਾ ਉਹਦੇ ਕਿਸੇ ਵਾਰ ਸ਼ਾਸਤਰ ਨਹੀਂ ਰਹਦੀ ਹੈ ਅਵਸਥਾ ਕਦੇ ਪ੍ਰਾਂਗਲਿਕ ਦੀ ਕਹਾਣੀ ਲਿਖਣ ਦੀ ਵਸਤਾ ਹੈ ਕਦੇ ਬੇਦ ਲਿਖਣ ਦੀ ਵਸਤਾ ਇਹਦੀ ਹਵਸਤਾ ਹੈ ਆਪ ਕਥੇ ਆਪ ਪੁੱਜੇ ਆਪੇ ਕਥਨ ਕਰਦਾ ਲਗਾ ਕੋਈ ਉਹਦੇ ਨਾਲ ਦਾ ਆਪ ਕਥਾ ਆਪ ਪੁੱਜੇ ਠੀਕ ਹੈ ਆਪੇ ਹੀ ਬਹਿ ਪੂਜਿਆ ਕਰਤਾ ਆਪ ਪਰਪੰਚ ਕਰੀਜੇ ਆਪੇ ਹੀ ਮੈਂ ਤੁਝੇ ਕਰਤਾ ਆਪੇ ਬੈਠ ਕੇ ਜੀਵਾਤਮਾ ਕਰਤੇ ਦੀ ਪੂਜਾ ਕਰਦੀ ਹੈ ਸਹਿ ਕੇ ਇਕ ਆਪੇ ਪਰ ਪੰਜ ਕਰੀ ਜਾ ਪਰ ਪੰਜ ਕਰ ਲੰਦਾ ਜੇ ਮਨ ਵਿਗੜ ਜਾਏ ਜੇ ਚੱਲੇ ਤੇਰ ਬਿਰਨ ਕੇ ਉਚਿਤ ਹੋ ਜਾ ਪਰਪਲਤੀ ਵੀ ਆਪ ਕਰ ਜਾਂਦਾ ਤੋਂ ਇਹ ਦੇਖਾ ਤਖੰਦੀ ਦੇ ਰਿਆ ਕਹਿਣ ਦੇ आप परवृत्त आप निर्वृत्त आपे आप अकथ कथिजे आपे आप पुन्न सब आप कराए आप अधिपत आप परवृत्त आप निर्वृत्त परवृत्त उधाय बदल जानो प्रवृत्ति निर्वृत्ति निर्वृत्त कर देन हर पहलणी लाभ प्रवृत्ति करबु दरलाया बल लाभ जी प्रवृत्ति करदे हुक बदले ਉਹੀ ਜਿਹੜੀ ਨਵਿਰਤੀ ਹੈ ਨਾ ਰਵਿਰਤੀ ਵੀ ਕਹਿੰਦੇ ਨੇ ਸਰਵਿਰਤੀ ਵੀ ਦਵਿਰਤੀ ਕਹਿੰਦੇ ਨੇ ਹਰਵਿਰਤੀ ਗਲਵਿਰਤੀ ਆਪਣਾ ਪਾਣ ਜਿਹੜਾ ਦੂਜੇ ਦਾ ਪਾਣਾ ਹੈ ਦੂਜੇ ਦਾ ਪਾਣਾ ਇੱਕ ਹੈ ਅੰਦਰਲਾ ਸਾਰਾ ਇੱਕ ਹੋ ਗਿਆ ਸਭ ਇੱਕੋ ਹੀ ਹੈ ਨਰਵਿਰਤੀ ਆਪਣੇ ਆਪਣੀ ਅੱਛਾ ਪੁੱਤਰਾਂ ਦਵਾਈਵਾ ਸਭ ਇੱਕੋ ਹੀ ਆਪੇ ਇਕੱਠ ਕਥੀ ਆਪੇ ਇਕੱਠ ਕਥਾ ਕਰਦਾ ਯਾਨੀ ਨਰਵ੍ਰਤੀ ਹੈ ਤਾਂ ਉਹ ਬਦੂਖ ਹੈ ਪਰਵ੍ਰਤੀ ਪਰ ਜਦ ਨਰਵ੍ਰਤੀ ਛੱਡ ਕੇ ਪਰਵ੍ਰਤੀ ਦੇ ਵਿੱਚੇ ਪਰਵ੍ਰਤ ਹੋ ਜਾਂਦਾ ਇੱਕ ਹੋ ਜਾਂਦਾ ਫਿਰ ਆਪੇ ਫਕਤ ਕਹਾਣੀ ਕਹਿੰਦਾ ਹੈ ਫਿਰ ਉਹ ਗੋਵਾਲੀ ਜਾਣਦਾ ਫਿਰ ਇਕੱਠ ਕਥਾ ਕਰਦਾ ਆਪੇ ਪੁੰਨ ਆਪ ਕਰਾਏ ਆਪਲੇਪਤ ਵਰਤੀਜੇ ਆਪ ਪੁਰ ਆਪ ਕਰਾਇ ਤੇ ਪੁੰਨਾ ਚੱਤੇ ਪਾਪ ਪਾਪ ਪੁੰਨ ਦੋ ਦੋ ਭਾਈ ਦੋਊ ਮਿਲ ਕੇ ਸੇਸੋ ਭਾਈ ਹਕਮਾ ਦਾ ਵਿਰੋਧ ਕਰਨ ਵਾਲਾ ਜਦ ਹੁਕਮ ਦਾ ਵਿਰੋਧ ਛੱਡ ਜਾਂਦਾ ਕੁੱਬੀ ਕੁੱਬੀ ਰਹਿ ਜਾਂਦਾ ਪਾਪ ਰਹਿਦਾ ਹੀ ਆਪੇ ਪੁੰਨਾ ਕਰਵਾ ਦੇ ਜਦ ਹੁਕਮ ਦਾ ਵਿਰੋਧ ਗੁਰਮੁਖਾ ਦਾ ਪੁੰਨ ਦੇ ਪੁੰਨ ਆਪ ਕਰਾਏ ਆਪ ਕੋ ਕਰਜ਼ਾ ਵੀ ਹੈ ਆਪ ਕੋ ਕਰ ਲੋ ਵੀ ਲੈਣਾ ਪੁੱਤ ਆਪ ਗੁਰਬਾਣੀ ਵੀ ਸਿੱਖਿਆ ਦਦਾ ਗੁਰੂ ਘਰ ਦਾ ਦੁਜੀਆ ਨੇ ਸਿੱਖਿਆ ਦੋ ਗੁਰੂ ਜੀ ਨੇ ਕੰਮ ਗਿਆ ਠੀਕ ਹੈ ਜੇ ਆਪ ਪੜਾਇਆ ਲੋਕਾਂ ਨੂੰ ਗੁਰਬਾਣੀ ਪੜਾਈ ਆ ਤਾਂ ਗਾਹਾਂ ਵੀ ਗਿਆ ਵੀ ਗਾਹਾਂ ਵੀ ਇਹ ਗੱਲ ਦੱਸੋ ਆਪ ਪੁਰਨਾ ਆਪ ਕਰਾ ਠੀਕ ਹੈ ਆਪ ਲਿਪਤ ਵਰਤੀ ਆਪ ਅਲਪਤ ਵਰਤੀਜੈ ਪਰ ਅਲਪਤ ਵਰਤੀਜੈ ਦਾ ਮਤਲਬ ਮੈਂ ਕਰ ਸਕਾਂ ਫੈਰ ਉਹ ਕਹਿੰਦਾ ਮੈਂ ਕਰ ਦੂੰਗਾ ਫੈਰ ਉਹ ਕਹਿੰਦਾ ਮੈਂ ਕਰ ਸਕਦਾ ਫੈਰ ਉਹ ਕਹਿੰਦਾ ਪਤਾ ਕਿਸੇ ਨੇ ਮੰਨਿਆ ਨਹੀਂ ਮੰਨਿਆ ਬਿਲਕੁਲ ਕੋਈ ਨਹੀਂ ਪਤਾ ਕਿਉਂ ਨਹੀਂ ਕੋਈ ਮੰਨਦਾ ਫੈਰ ਕੋਈ ਚੀਜ਼ ਨਹੀਂ ਕਿਉਂ ਬੰਦਾ ਐਵੀ ਕੋਈ ਫੈਰ ਇਹ ਨਹੀਂ ਉਹਦੇ ਕਰਮ ਚੱਗੇ ਹੁੰਦਾ ਉਹਦੇ ਕਰਮ ਮਾੜੇ ਹੋਦੇ ਹੀ ਹੁੰਦਾ ਵੇਰ ਆ ਕੀ ਹੈ ਇੱਕ ਅਲਪਤ ਅਵਸਥਾ ਠੀਕ ਹੈ ਬੁਲਾ ਕੇ ਜੱਟੂ ਕਾ ਏ ਦੀ ਫਿਰ ਵੀ ਲਿਪਟਾ ਉਹਨ ਕਰਦਾ ਵੀ ਆ ਉਹਨ ਕਰਾਉਂਦਾ ਵੀ ਆ ਪਰ ਹਲਕ ਤੜੇ ਨਾ ਫਿਰ ਨਾਖ ਦੇ ਮੁੰਡੇ ਹੀ ਨਹੀਂ ਬੰਨ੍ਹੇ ਲਿਪਟਾ ਨੂੰ ਤਾਂ ਇਹਨਾਂ ਨੇ ਕਰ ਹੋਈ ਨਹੀਂ ਜੀ ਇਹ ਦਾ ਮਾਲ ਠੀਕ ਹੈ ਜੀ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀਜੈ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀਜੈ ਆਪੇ ਸੁਖ ਦੁਖ ਆਪੇ ਦੁਖ ਦੇ ਇਹ ਦੁੱਖ ਦੀ ਬਖਸ਼ਿਸ਼ ਹੈ ਇਹਦਾ ਇਹਨਾਂ ਅਰਥ ਕਰਦੇ ਹੋ ਵੀ ਸੁੱਖ ਤੋਂ ਇਹ ਤਮਾ ਨੇ ਬਦਵਾਨ ਨੇ ਇਹ ਤੋਂ ਤਲਵਾਰ ਸਿਕਰੋਣੇ ਕਿ ਪਰ ਕਿਤਨਾ ਦੁੱਖ ਪੂਖ ਵਾਦ ਤੇਰੀ ਦਾਤਾਰ ਇਹ ਤਾਂ ਦਾਤ ਹੈ ਇਹਦਾ ਬਖਸ਼ਿਸ਼ ਹੈ ਨਾ ਦੁੱਖ ਤਾਂ ਇਹ ਤਲਵਾਰ ਫਿਰਤੇ ਤਮੀ ਹੋਈ ਹੈ ਨੌਵੇਂ ਪਾਸ਼ਾ ਦੇ ਜਿਸ ਦੀ ਸਮਝਾ ਜੋਖਾ ਉਹ ਬਖਸ਼ਿਸ਼ ਹੈ ਜੋ ਪਦਵੀ ਦੋਵੇਂ ਪਾਸਿਆਂ ਨੂੰ ਮਿਲਦੀ ਜਿਸ ਨੂੰ ਬੇੜੀ ਆਲੀ ਹਾਏ ਹਾਏ ਹਾਏ ਸਭ ਜਗ ਪਏ ਜੈ ਜੈ ਜੈ ਸੁਰੋਗ ਸੁਰੋਗ ਉਹ ਵੀ ਜੈ ਜੈ ਹੋ ਰਹੀ ਹੈ ਇਹ ਤਾਂ ਬਖਸ਼ਿਸ਼ ਹੈ ਅਰੇ ਹਿੰਦੂ ਕਹਿੰਦੇ ਨੇ ਗੁਰਤੇਗ ਬਾਦੂ ਬੁੱਧ ਨਹੀਂ ਸਭ ਤੋਂ ਜਾਦਾ ਗੁਰਤੇਗ ਬਾਦੂ ਹਿੰਦੂ ਮੰਦੇ ਨੇ ਜਿੰਨ ਦੀ ਯਾਦ ਕਰਕੇ ਯਾਦ ਕਰਦੇ ਸੀ ਬਖਸ਼ਿਸ਼ ਨਹੀਂ ਤਾਂ ਹੋਰ ਕੀ आप पे सुख दुख देवे करता आप पे बख्श करीजे एथे 8वी पौड़ी समाप्त ती है जी